ਵੇਰ ਤੁਹਾਨੂੰ ਕੋ ਧੰਨ ਤੇਰਾ ਨੋ ਨਿਥਾਵੇ ਕੋ ਨੋ 1300 ਹੁਣ ਜਿਹੜਾ ਅਸੀਂ ਜਿਹਨੂੰ ਦਿੱਕਤ ਗੁਰਬਾਣੀ ਚ ਕਹਿੰਦੇ ਗੁਰਬਾਣੀ ਨਾਲ ਨਿਰਤੰਦ ਉਹਦੇ ਬਾਅਦ ਤੇ ਤੇਰਾ ਜਿਹੜਾ ਨਾਮ ਗਿਆਨ ਉਹ ਤੁਹਾਨੂੰ ਸਾਡੇ ਡਿਕਸ਼ਨਰੀ ਚ ਦਿੱਕਤ ਨਾਲ ਆਰਤਾਂ ਦਾ ਅਰਥ ਹੈ ਦੁਨੀਆ ਦੀ ਡਿਕਸ਼ਨਰੀ ਚ ਕੁਝ ਹੋਵੇ ਸਮਝਿਆ ਨਹੀਂ ਤੁਹਾਨੂੰ ਕੁੜੇ ਡਿਕਸ਼ਨਰੀ ਨਵੀਂ ਬਣ ਰਹੀ ਹੈ ਜੇ ਤੁਸੀਂ ਜਨਦੀ ਦੇ ਇਤਲਾਫ ਚੱਲਣਾ ਹੈ ਤਾਂ ਅਗਰ ਗੱਲ ਬੜੀ ਜੀ ਨਹੀਂ ਨਹੀਂ ਮਾਰੀ ਕੁਰਬਾਨੀ ਹੋਣੀ ਤੇ ਜਨਦੀ ਦੀ ਬਤਰੀ ਉਹ ਕਹਿੰਦਾ ਜਿਹੜਾ ਨਰਤਾ ਨੇ ਉਹਦੇ ਬਾਤ ਤੇ ਤੇਰਾ ਨਾ ਹੁੰਦਾ ਤੇ ਕਿਹੜਾ ਨਰਤਾ ਨਾ ਹੈ ਸਖਾਂ ਜਿਹੜਾ ਉਹ ਮੈਂ ਬੋਲਦਾ ਇਹ ਗੱਲ ਚੋਰੀ ਵੰਦੇ ਤਾਂ ਸਹੀ ਨਹੀਂ ਕਿਸੇ ਦੇ ਚੋਰੀ ਦੱਸਿਆ ਫਿਰ ਆਪ ਵੀ ਤਾਂ ਤੋੜ ਤੋੜੇ ਫਿਰਦੇ ਸੰਸਾਰੀ ਤਾਂ ਤੋਂ ਸੰਸਾਰੀ ਤਾਂ ਤੋਂ ਫੱਟੀ ਪੁੱਜਦੀ ਸੀ ਸੰਸਾਰੀ ਤਾਂ ਤੋਂ ਫੱਟੀ ਨਾ ਪੁੱਜੇ ਇਹ ਗੱਲ ਕੋਈ ਦੱਸੀ ਨਹੀਂ ਤਸੀਬ 16 ਜਿਹੜਾ ਮੈਂ ਤੁਹਾਨੂੰ ਦਾਰੇ ਗੱਡੀਆਂ ਦੇ ਵਿੱਚ ਇੰਨਾ ਜਿਹੜੇ ਲੱਖਾਂ ਰੁਪਏ ਰੋਜ਼ ਇਹਨਾਂ ਨੂੰ ਡੀਏ ਡੀਏ ਖਰਚ ਕਰ ਇਹ ਸਭ ਤਾਨ ਕੋਇਆ ਕਹਿੰਦੇ ਸਿੱਖੀ ਸਿੱਖੀ ਖਤਮ ਹੋਣੀ ਮਜੂਰਾ ਮਾਇਆ ਨਹੀਂ ਰੋਲ ਜਾਈਦੀ गोल को का तो नहीं जाती ही जो दौरे तो सिखि का कोई कोई रोड़ा नहीं होता है सिखिते से मड़े कदर ना मड़े पलकड़ा कड़ा प्रसाद बनता रहे तो रोटी और कड़ा प्रसाद ही बनता रहे बस संत तो धीरे चला बस चढ़ता रहे ये रहे बाकी सिखि का हीरो है जो मिशन थी वो तो खत्म हो गया जो विषमता खत्म हो गया सिर्फ कागद वास्ते सब कुछ है तो। एक तो लिखा है कि जे कोई दो चार आदमी चर्ण सिखिया प्रचार करना होना वास्ते अड़क्का जरूरी है सो तो आ गए यार उठे दीप को बोला है उठे इतना वो लंगर पड़ा है उठे एठे बड़े-बड़े आदमी चल हैं एक, एक है सिर्फ एज वास्ते अड़कारे ਕਿਦੇ ਬੜੇ ਮਿਸ਼ਨ ਸੀ ਹੋਊਗਾ ਉਪਰ ਵਿਸ਼ਲ ਡੀਸੀ ਹੈ ਕਦੇ ਵੀ ਪਹਿਲਾਂ ਗੁਰੂ ਘਰ ਕੱਲਾ ਪ੍ਰਚਾਰ ਕਰਦਾ ਸੀ ਇਸ ਤਰੀਕੇ ਨਾਲ ਪ੍ਰਚਾਰ ਨਹੀਂ ਸੀ ਹਿਸੇ ਦਾ ਜਿਵੇਂ ਹੁਣ ਹੁੰਦਾ ਜਿੱਤੇ ਦੇਰੇ ਬੜੇ ਸ੍ਰੀ ਚੰਦ ਦਾ ਸੀ ਚਾਹੇ ਚਾਹੇ ਉਹ ਗੁਰੂਦਵਾਰ ਸੀ ਚਾਹੇ ਇੱਥੇ ਗੁਰਦੁਆਰਾ ਸੀ ਚਾਹੇ ਦੂਆ ਖੁਦ ਅਸਰ ਇਹ ਦੇਰੇ ੜਕਾਈ ਬਣ ਰਹੇ ਤਾਂ ਕਿ ਅਧਿਆਨੰਦ ਪ੍ਰਭਾਅ ਖਾਲਸੇ ਨੂੰ ਕਿ ਤੁਸੀਂ ਇਹਨਾਂ ਨਾਲ ਮਿਲ ਨਹੀਂ ਲੱਗੋ। ਪੀਰ ਬੰਦਿਆਂ ਨਾਲ, ਪੀੜਿਆਂ ਨਾਲ, ਮਸੰਦਾਂ ਨਾਲ, ਆਰਾਮ ਰਈ, ਆਰਾਮ ਰਾਜ, ਉਹ ਡੇਰਾ, ਆਰਾਮ ਰਾਜ ਉੱਥੇ ਪਤਾ ਜਾਂ ਘਰ ਦੇ ਜਪੇ ਤੇ ਇਹ ਸਾਰੇ ੜਕਾਈ ਸੀ, ਅੱਜ ਵੀ ੜਕਾਈ ਨੇ। ਪਹਿਲਾਂ ਵੀ ੜਕਾ ਸੀ ਅੱਜ ਵੀ ੜਕਾਈ। ੜਕਾ ਰਹੇ ਨੇ। ਨਹੀਂ ਤਾਂ ਇਹਨਾਂ ਦਾ ਪਟੋਲ ਨੂੰ ਅੱਗ ਪੈਣੀ ਚਾਹੀਦੀ ਸੀ। ਆਮ ਲੋਕਾਂ ਨੂੰ ਬਾਹਰ ਜਿੱਤ ਪਤਾ ਲੱਗਿਆ। ਉਹ ਕਿਉਂ ਚੁੱਪ ਗਵਾਉਂਦੇ जुड़ गए ए नाल बच्चा ए चोरी जुड़ दे जिन्ना दी हालंगे ड्यूटी है प्रचार करना जिन्ना ਕੋ αρ்பਰ ਰੱਈਆ ਹੈ ਇਹ ਇਹਦੇ ਵਿੱਚ ਖਰਚ ਕਰ ਦੂ ਉਹ ਉਹਨੂੰ ਇਹਦਾ ਮਤਲਬ ਹੈ ਸੀ ਇਹ ਰੋੜੇ ਨੇ ਰੋੜਾ ਹੋ ਰੋ ਵੜਦਾ ਇਸ ਰੋੜੇ ਨੇ ਤਾਂ ਜੀ ਮੇਰ ਤੁਹਾਨੂੰ ਕੋ ਤਨ ਤੇਰੋ ਨੋ ਨਿਸਾਵੇ ਕੋ ਨੋ ਤੇਰਾ ਸਾਰ ਨਹੀਂ ਤੁਹਾਨੂੰ ਤਨ ਤੇਰੋ ਨੋ ਜੇ ਕਿਸੇ ਕੋ ਤਨ ਹੈ ਜੀ ਤੇਰਾ ਨਾਮ ਹੈਗਾ ਉਹਨੂੰ ਤੇ ਸਾਡੀ ਕਹਿ ਸਕਦੇ ਉਹਨੇ ਕਹਿ ਸਕਦਾ ਪਾਝਾ ਉਲਟ ਹੋ ਵੀ ਉਹਨੇ ਤਾਂ ਦੀ ਗਿਆਨੀਆਂ ਦਾ ਤਾਂ ਨਾ ਗਿਆਨਵਾਨ ਨਵਨਾ ਦਾ ਨਾਮ ਹੈ ਤੁਹਾਨੂੰ ਹੁੰਦਾ ਨਾਟਕ ਨੇ ਕਿੰਨੇ ਬੌਂਡ ਬੰਨ ਕੇ ਲੈ ਗਿਆ ਦਾ ਮੋਰਾਂ ਬਾਦੂ ਗਿਆਨਸੀ ਕੋੜ ਜੇਬ ਖਾਲੀ ਮਈਆ ਢਾਢੀ ਬੱਲੇ ਨਾਮ ਜੀ ਕੋੜ ਰੋਈ निमाळे को प्रभु तेरो मान सगळ कटा को देवो दा निमाळे को जिदा संसार नहीं है जिने को संसार ही नहीं है जदों का तेरा नाम हैगा तो सब कुछ होगो जिदा मान संसार जि नहीं है ते तेरी तो राज मान चौधरी को सारान ज्यादा बोल उने जी लाने ने केना जी ਜਿਹੜੇ ਤੇਰੀ ਦਰਗਾਹ ਤੇ ਬਰਕਤਾਂ ਪ੍ਰਾਪਤੇ ਨਹੀਂ ਇਹਨਾਂ ਦਾ ਦਸਤਾਵਾ ਨਾ ਸੀ ਤਾਂ ਲੈ ਲਉਂਤੀ ਆ ਇੱਥੇ ਦਾ ਸਰੋਪਾ ਦਿੱਤਾ ਦਰਗਾਹ ਦੀ ਪਰਵਾਨਾ ਅਗਰੇ ਕਹਿੰਦਾ ਇਹਨਾਂ ਦਾ ਲਿਆ ਗਿਓ ਮਨ ਮੁਖਾ ਤੇ ਤੈਨੂੰ ਤਾਂ ਅਸੀਂ ਨਹੀਂ ਦਿੱਤੇ ਤੁਸੀਂ ਕਿਉਂ ਲਈਏ ਉਹ ਜਰਾ ਮਤਲਬਾ ਕੰਮ ਦੋ ਸੋ ਪਾ ਰਿਆ ਜੀ ਨੇ ਕਦ ਤੱਕ ਹੁਦੋਂ ਪਾਇਆ ਜੀ ਸੁਫੀਰ ਕੋ ਚਲ ਰਗਾ ਪਾ ਦੇ ਮੈਂ ਕਹਿੰਦਾ ਪਾ ਕੱਲੋਂ ਪੜੀ पार्टी ਦੀ ਤੂੰ ਉਹਨਾਂ ਦਾ ਸਲਮਾਨ ਲੈ ਕੇ ਆਜ मेरे को ਕੋ ਆ ਗਿਆ ਜਵਾਬ ਜਾਂ ਤੇਰਾ ਨਿਸ਼ਬਾਰ ਹੈਗਾ ਜਵਾਬ ਜੇ ਕੋਹਾਂ ਤੇ ਤਾਂ ਗਿਆ ਬਾਬਲੇ ਅਜੇ ਤੱਕ ਨਾ ਰੁਕੇ ਸੰਸਾਰ ਦੇ ਬੜਿਆਈਆਂ ਦੁਨੀਆ ਦੀਆਂ ਮੜਿਆਈਆਂ ਅੱਗੀਛੇ ਤੀ ਜਾਣ ਇੱਕਧਿਆਇ ਆਇਆ ਸਾਡੇ ਅਕੀ ਦੇਤੀ ਦੀ ਜਿੱਚੀ ਜਗ ਜਾਲਿਆ ਸਾਰਾ ਸੰਸਾਰ ਜੜਿਆ ਫੁੱਤਾਂ ਆਲੇ ਆਲੇ ਹੋਇਆ ਦਿੱਤਾ ਨਾਮ ਬਸਾਰ ਨਾਮ ਤਾਂ ਇਸੇ ਤੇ ਬੜਿਆਈ ਦੇ ਬਸਾਰਿਆ ਇਹ ਹੰਕਾਰੇ ਟਕਰਾਇਆ ਨਾਮ ਦੇ ਨਾਲੇ ਇਹੀ ਤਾਂ ਰਹਿੰਦਾ ਇਹੀ ਵਿਰੋਧ ਕਰਦਾ ਹੰਕਾਰੇ ਆਹ ਹੈਗਾ ਨਹੀਂ ਹੋਰ ਜਿਹੜਾ ਉਹ ਜਿਹੜਾ ਕਹਿੰਦਾ ਮੈਂ ਬੀਜ ਮੰਤਰ ਦਾ ਨਾ ਉਸ ਦਾ ਨਾ ਹੋਤਾ ਹੈ ਮੈਂ ਉਹ ਦਿਨਾਂ ਨੇ ਅਮਰੀਕਾ ਲੈਣ ਜਿਹਨੂੰ ਕਰਤਾ ਸਨਮਾਨ ਦਿੱਤਾ ਅਮਰੀਕਾ ਨੂੰ ਰੋਜ਼ ਕਰਦੇ ਜੂ ਰੋਜ਼ ਸਨਮਾਨ ਦਾ ਖਵਾਰਨ ਆਪਾਂ ਨਹੀਂ ਲੜੀ ਨੀ ਮੇਮਾਰੇ ਕੋ ਨਾ ਭਈ ਜੇ ਉਹ ਬੀਜ ਮੰਤਰ ਵਾਲਾ ਹੈ ਜਿਹੜਾ ਉਹ ਦੱਸਦਾ ਜੇ ਐਡਾ ਇਹਨਾਂ ਨੂੰ ਤੇ ਲੈਣਾ ਕੀ ਹੈ ਉਹਨਾਂ ਨੇ ਕਿਹਾ ਉਹਨਾਂ ਨੇ ਕਿਹਾ ਪੂਰੇ ਪੇਜ ਦੀ ਅੱਜ ਉਹ ਨਹੀਂ ਜਾਂਦੀ ਖਵਾ ਪੂਰੇ ਪੇਜ ਦੀ ਅੱਜ ਪਹਿਲੇ ਪੇਜ ਦੀ ਪੂਰੇ ਦੀ 5 ਲੱਖ ਦੀ ਹੁੰਦੀ ਉਹ ਪੂਰੇ ਪੇਜ ਦੀ ਅਮਰੀਕਾ ਜਾ ਮਿਲਿਆ ਜਿਵੇਂ ਮਾਲ ਵੇਚਣ ਵਾਲੇ ਨਹੀਂ ਕਹਿੰਦੇ ਆ ਸਾਡੀ ਤਾਂ ਬੂਰੇ ਕੀਤਾ ਉਹ ਤਾਂ ਉਹਨਾਂ ਨੇ ਬਲੀ ਦਾ ਇਤਿਹਾਸ ਕਰਾਇਆ ਬਾਅਦ ਚ ਉਹ ਤਾਂ ਉਹਨਾਂ ਨੇ ਸੋਚ ਕੇ ਨਾ ਨੂੰ ਗੱਲਬਾਤ ਵੀ ਲੈ ਕੇ ਆਉਣੇ ਜਿਹੜੇ ਇੱਥੇ ਰਹੇ ਇੱਕ ਜੇ ਏਰੀਏ ਜਾ ਕੇ ਉਹ ਵਿਚਾਰ ਗੁੰਨਾ ਹੋਊਗਾ ਗੱਲਬਾਤ ਮੈਂ ਤਾਂ ਭੈਜਣਾ ਹੈ ਉਹ ਇਹ ਮੱਧਿਆ ਨੂੰ ਇਹ ਨਾਲ ਨੂੰ ਲਿਜਾ ਕੇ ਅਸਤ ਕਮਾਲ ਤੋਂ ਵੀ ਹੈਗਾ ਬੇਦਰਾਂ ਉਹ ਬੇਡ ਨੂੰ ਮੰਨ ਲੈਣਾ ਹੈ ਨਾ ਰੋਕਾਂ ਦੇ। ਹਾਂ ਬੇਡ ਠੀਕ ਆ ਜੇ ਸੁਭਨ ਸ਼ਾਸਤਰ ਦੱਸਦਾ ਹੈ ਤੇ ਉਹ ਨੂੰ ਹੀ ਰੋਲ ਦੇ। ਆ ਲੱਗ। ਇਹ ਜੰਤਰਪੁੱਤਰ ਐ ਜਿਹੜੇ ਦੂਏਨ ਸਾਹਿਬ ਉਹਨੇ ਕਹਿਣਾ ਜੀ ਕੋਈ ਕੰਮ ਨਹੀਂ। ਬਾਅਦ ਚ ਇਹ ਕਹੋਣਾ ਪਰ ਫਿਲਹਾਲ ਇਹਨਾਂ ਪ੍ਰੋਗਰਾਮ ਆ ਰਹੇ ਹੈ। ਉਹ ਲੋਕ ਹੋਰ ਵੀ ਬੜੇ ਛਾਣੇ ਨੇ ਸਾਡੇ ਸਾਰੇ। ਉਹ ਹੋਰ ਤਰੀਕੇ ਨਾਲ ਕੰਮ ਕਰਦੇ ਨੇ। ਅੰਗਰੇਜ਼ ਨੇ ਕਿਹਾ ਜਦੋਂ ਇਹਨਾਂ ਦੇ ਨਿਰਦੇਸ਼ ਹੀ ਆਪਣੇ ਰਚਨੋ ਹੇ ਹੁਲਾ ਹੈ ਬੰਦਾ ਸਾਡੀ ਬੇਨੰਦ ਅਸੀ ਜਿਹੜਾ ਹਮ ਹਮ ਆਹੋ ਹੈ ਬੰਦਾ ਮੁਕਤੀ ਦਾ ਪੱਤਰ ਹੈ ਸਵਰਗ ਦਾ ਸਵਰਗ ਦਾ ਦਾ ਦੱਸਿਆ ਉਹ ਇੱਕ ਵਕੀਲ ਨੇ ਜਾ ਕੇ ਉਹ ਦੂ ਲੋਟੇ ਕਰ ਲਿਆ ਉਹ ਸਾਰੇ ਪੈਸੇ ਜਮ੍ਹਾਂ ਕਰਾ ਦਿੱਤੇ ਨਰਕ ਦੀਆਂ ਸੀਟਾਂ ਕੋਲ ਕਰਾ ਲਈਏ ਥੋੜੇ ਪੈਸੇ ਲੱਗਦੇ ਸੀ ਉਹ ਹਾਰਾਂ ਦੇ ਤਾਂ ਵੀ ਨਰਕ ਸਾਰਾ ਮੇਰੇ ਕੋਲ ਨਰਕ ਚ ਜਾਏ ਨਹੀਂ ਸਕਦਾ ਨੇ ਕਹਿੰਦਾ ਜੇ ਸੁੱਖ ਤੇਰੇ ਕੋਲ ਸੀ ਤਾਂ ਨਰਕ ਤੇਰੇ ਕੋਲ ਕਹਿੰਦਾ ਹਾਂ ਮੇਰੇ ਕੋਲ ਉਹਦੇ ਪੈਸੇ ਉਹ ਪੈਸੇ ਬਹੁਤ ਥੋੜੇ ਜਿਹੇ ਦੇ ਉਹਨੇ ਟੋਟਲ ਸਿੱਕਾ ਹੌਲੀ-ਹੌਲੀ ਪੁੱਛ ਲਿਆ ਗੱਲ ਹੀ ਲੱਗ ਰਹੀ ਉਹ ਗੀਨ ਸੀ ਨਾ ਮੈਨੂੰ ਵੀ ਪਤਾ ਕਿ ਕੀ ਫਸਾਉਂਦਾ ਵੈ ਉਹਨੇ ਸਾਰੇ ਨਾਲ ਬੁੱਕ ਕਰਾ ਲਿਆ ਪੇਪਰਾਂ ਦੇ ਦਿੱਤਾ ਉਹ ਸਾਰਾ ਸਿਸਮ ਕਰਤਾ ਥੋਕ ਲਾ ਕੇ ਇਹਦਾ ਉਤਾਰੇ ਜਦੋਂ ਉਹ ਇਸ ਤਰੀਕੇ ਨਾਲ ਮਾਰਨੇ ਉਹ ਦੂਏ ਰੋਡ ਮਾਰਦੇ ਸੀ ਨਾ ਅੰਗਰੇਜ਼ਾਂ ਦੀ ਆਪਣੀ ਅਖਲ ਹੈ ਸਾਡੇ ਵੱਲੋਂ ਹੋਤਰਾਂ ਦੀ ਅਖਲ ਨਹੀਂ ਮਾਰੀ ਦਿਖਾਓ ਜੀ ਇਹ ਤੁਹਾਡੇ ਕੋਲ ਤਾਕਤ ਹੈ ਚੱਲ ਸਿੱਧੀ ਗੱਲ ਕਰ ਨਾ ਤਾਂ ਕੋਈ ਹੈ ਫਿਰ ਕਿ ਨਾ ਜਰ ਬਾਨੇ ਲਈ ਜਾਣ ਕੋਈ ਕਹਿੰਦਾ ਨਹੀਂ ਇਹ ਸਬਦ ਹੈ ਮੈਂ ਨਹੀਂ ਗੱਲ ਹਾਂਜੀ ਹਾਂਜੀ ਨਿਮਾਨੇ ਕੋ ਪ੍ਰਭ ਤੇਰਾ ਮਾਨ ਸਗਲ ਘਟਾਂ ਕੋ ਦੇਵੋ ਦਾਨ ਨਿਮਾਨੇ ਕੋ ਪ੍ਰਭ ਤੇਰਾ ਮਾਨ ਜੇ ਬਦ ਮਾਨਾ ਸਕੇ ਤਾਂ ਬੜੀ ਇੱਜ਼ਤ ਨਹੀਂ ਤੇਰਾ ਮਾਨ ਹੈ ਉਹ ਜੇ ਤਕੀਨ ਉਹ ਭਾਈ ਜੀ ਦਾ ਰਾਜਾ ਇਦਾਂ ਰਾਜ ਦਰਬਾਰ ਜਮਾਨ ਹੋਵੇ ਇਹ ਛੋਟੇ ਵੀ ਕਰਦੇ ਮਾਨ ਉਹ ਨਹੀਂ ਲੈਣਾ ਕੀ ਛੋਟੇ ਉਹ ਕਹਿੰਦੇ ਬੱਚਾ ਬੱਚਾ ਮੈਨੂੰ ਮਾਨ ਕਰੋ ਕੀ ਲੋਕ ਲਈ ਕਹਿੰਦੇ ਕੋਈ ਪ੍ਰੈਜ਼ੈਂਟ ਟਾਈਮ ਤੇ ਐਸਾ ਹੀ ਹੁੰਦਾ ਹੈ ਜਾਂ ਕਿਬੀਰ ਹੈਗਾ ਸਕਬੀਰ ਦਾ ਮਾਨ ਨਹੀਂ ਹੋ ਰਿਹਾ ਅੱਲਾਹ ਹਾਂ ਕੋਈ ਜਨਨ ਦਾ ਮਾਨ ਸੀ ਲੋਕਾਂ ਦਾ ਉਹ ਕੁ ਵਿੱਚ ਤਾਂ ਖਰਾਬ ਬੋਲਦੇ ਸੀ ਤੇ ਬਾਅਦ ਦੇ ਅਜਿਹੀ ਹਾਲਤਾਂ ਪਹਿਲੀ ਹੱਦ ਤੱਕ ਸਰਕਰ ਰੋਜ਼ ਗੁੱਲਵਾਣਾ ਵੀ ਹੋ ਰਿਹਾ ਸਾਰਾ ਰੋਜ਼ ਹੋ ਰਿਹਾ ਆਖੀ ਮੂਰੇ ਕਬੂਰ ਜਟਿਆ ਤੇ ਆਖੀ ਮੂਰੇ ਨਾਮ ਜਿੰਦ ਜਟਿਆ ਉਹ ਜਿਹੜੀ ਥੋੜੀ ਸੀ ਜਿਹੜੀ ਅੱਜ ਬਾਅਦ ਦੇ ਵਿੱਚ ਸਿਆਣੇ ਬੰਦੇ ਪੈਦਾ ਹੋ ਗਏ ਉਹ ਕਹਿੰਦੇ ਆ ਬੰਦੇ ਤਾਂ ਠੀਕ ਜੀਓ ਉਹ ਦੂਸਰੀ ਲੋਕ ਬੜਦੇ ਬਾਤਾਂ ਬਾਤ ਵਿੱਚ ਸੈਲਰੀ ਵੀ ਹੋ ਜਾਂਦੇ ਕੋਈ ਗੇਰ ਬਾਤ ਹੁੰਦੀ ਹੈ ਦੂਸਰੀ ਹੋ ਜਾਂਦੀ ਹੈ ਭਾਈ ਪਿਛਲੇ ਬੰਤੇ ਆਈ ਜਾਂਦੇ ਉਹ ਕਹਿੰਦੇ ਨੇ ਕਿ ਠੀਕ ਠੀਕ ਹੈ ਬਲਵਲਟ ਉੱਦਿਆ ਘਟਾ ਕੋ ਦੇ ਤਾਂ ਸਗਲ ਘਟਾ ਕੋ ਦੇ ਤਾਂ ਸੁਭਾਨੈ ਕੋ ਪ੍ਰਭ ਤੇਰੋ ਦੇਵੋ ਦਾਨ ਸਰਗਕ ਅਜਲ ਤਾਂ ਅਜਲ ਦੂਰ ਜਿਹੜਾ ਮਾਨ ਦਿੱਤਾ ਕਈ ਦਸਤਾਂ ਦੇ ਰੂਪਹਿ ਦਾਨ ਦਾਨ ਮਾਨ ਦਾਲੇ ਹੈ ਜਿਹੜੇ ਦਾਨ ਦੇ ਉਹ ਮਾਇਆ ਖੌਣ ਬੜਾ ਮਾਇਆ ਬੜਿਆ ਜੁਣ ਮਾਇਆ ਦਿੱਤੀ ਹੈ ਦਾਨ ਦਿੱਤਾ ਹੈ ਉਹ ਬੜਿਆ ਹੀ ਤਾਹੀ ਮਾਨ ਹੈ ਇਹਾ ਸੋਪਰਟਾਈਜ਼ ਨਾਲ ਲੜਾਈ ਇਹ ਵੀ ਤੈਉ ਦਸਤਾ ਚੈਹ ਸੰਸਾਰੀ ਬਰੁਣਾ ਚੈਹ ਦੁਆ ਬਰੁਣਾ ਸਾਨੂੰ ਦੋਹਾ ਹੈ ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾਂ ਕੇ ਅੰਤਰ ਜਾਣੇ ਕਰਨ ਕਰਾਵਣ ਹਾਰ ਸੁਆਮੀ ਕਰਨ ਕਰਾਵਣ ਹਾਰ ਹੈ ਜਿਹੜਾ ਸੋਧੀ ਉਹ ਸੋਧੀ ਹੈ ਦਾਸ ਨਹੀਂ ਹੈ ਦਾਸ ਦਾ ਸੁਆਮੀ ਇਹਦੇ ਦਾਸ ਹੈ ਇਹ ਸੋਧੀ ਵੀ ਕਰਦਾ ਹੈ ਜੇ ਸਾਬੇ ਜੇ ਦਾਸ ਕਰਦਾ ਉਹ ਸਾਬੀ ਦਾ ਕਰਾਇਦਾ ਹੀ ਕਰਦਾ ਹਾਂ ਇਸ ਕਰਕੇ ਕਾਪੇ ਕਰਾ ਬਹਰ ਸਾਬੀ ਹੋ ਗਏ ਲਹਾਸਾ ਵਿੱਚ ਚਲਾਇਆ ਹੀ ਚੱਲੇ ਜਿਸ ਨੂੰ ਚਲਾਏ ਤੇ ਮੈਂ ਸਾਈਕਲ ਆਪੇ ਚਲਾਉਂਦੇ ਆਂ ਜਾਂ ਮੈਂ ਚਲਾਉਂ ਨਹੀਂ ਚੱਲਦਾ ਉਹਦਾ ਕਮਸ਼ੀਰ ਵਾਂਗੂ ਹੀ ਹੈ ਉਹਦਾ ਸਰੀਰ ਕਮਸ਼ੀਰ ਵਾਂਗੂ ਹੀ ਹੈ ਕਿ ਹੁਕਮ ਆਪਣੇ ਦਿੱਤੇ ਚਲਣਾ ਦੂਏ ਦਾ ਹੁਕਮ ਚੱਲਣ ਫਿਰ ਉਹਦੇ ਜੁਬਲੀ ਦੀ हुक्म ਜਾਂ ਦੂਰ ਦੇ ਚੱਲਣਾ ਅਸਲ ਵਿੱਚ ਜੇ ਹੁਣ ਭੋਜ ਤੋਂ ਗੋਲੀ ਚੱਲਦੀ ਹੈ ਬੰਦੇ ਮਰਦੇ ਨੇ ਤਾਂ ਕਸੂਰ ਗੋਲੀ ਚਲਾਉਣ ਵਾਲੇ ਦਾ ਨਹੀਂ ਬਣਦਾ ਫੋਕਮ ਤੇ ਹੁਕਮ ਵਾਲੇ ਦਾ ਉਹ ਵੀ ਉੱਤੇ ਸਿਰੇ ਦਾ ਜਿਹੜਾ ਹੁਕਮਾ ਥੱਲੇ ਵਾਲੇ ਦਾ ਸਾਰੇ ਉਹਦੇ ਅੱਗੇ ਚੱਲਦੇ ਜਿਹੜਾ ਆਖਰੀ ਉਹਨਾਂ ਫਰੀਦੋ ਰੁਕਦੇ ਆ ਕਸੂਰ ਉਹਦਾ ਨਹੀਂ ਯਾਦ ਰੰਗੜੇ ਸਰਮਤੋਂ ਤੋਂ ਬਾਕੀ ਜਨਨ ਨੂੰ ਦਿੰਦੇ ਨੂੰ ਦਾ ਗੁਰੂ ਹੁਕਮ ਤੇਰਾ ਉਣਾ ਨੂੰ ਦੇ ਦੇ। ਹਈ। ਕੰਨ ਕ੍ਰਾਵਣ ਹਾਰ ਸਵਾਮੀ ਸਗਲ ਕਟਾ ਕੇ ਅੰਤਰ ਜਾ। ਕੰਨ ਕ੍ਰਾਵਣ ਹਾਰ ਸਵਾਮੀ ਹੋਣੇ ਕੰਨ ਕ੍ਰਾਵਣ ਨਾਲ ਤਾਂ ਸਭੀ ਜੋ ਵੀ ਕੁਛ ੱਟੇ ਹੋ ਰਿਹਾ ਸੁਛਾਤ। ਪਹਾਰ ਬੜਾ। ਧੋ ਘੋ ਘੋ। ਜੰਬੜਿਆ ਬੰਨ। ਜਾਸੇ ਆਪ ਜਾਸੇ। ਸਾਰਕ ਘੜਾ ਕੇ ਅੰਦਰ ਕਰਨੀ ਸਾਰਿਆਂ ਦੇ ਅੰਦਰ ਦੀ ਗੱਲ ਜਾਂਦਾ ਵੀ ਉਹ ਆਪਣੀ ਗੱਤ ਵਿੱਚ ਜਾਨੋ ਆਪੇ ਅਪਨ ਸੰਗੀ ਕਸਮਤ ਹੋਲੇ ਮਨ ਦਿੱਤੀਏ ਕੋਈ ਵੀ ਜਾਣਦਾ ਸਾਡੇ ਸਾਹਾਂ ਨੂੰ ਉਹ ਜਾਣਦਾ ਸਾਡੇ ਸੀ ਆਈਡੀ ਉਹ ਕੋਣਾ ਉਹਦੇ ਬਾਰੇ ਸਾਡੂ ਕੁਝ ਵੀ ਨਹੀਂ ਪਤਾ ਸਗਲ ਘਟਾ ਕੇ ਆਪਣੇ ਜਾਣਦਾ ਘਟਾ ਅੰਤਰ ਜਾਪੂ ਦਾ ਹੈ ਉਹ ਪਰ ਆਪਣੀ ਗੱਲ ਮਤਾ ਤੇ ਜਾਣਦਾ ਆਪਣਾ ਸੰਗ ਆਪਕੋ ਸੰਗੀ ਆਪ ਪ੍ਰਭ ਰਸਤੇ ਪਰ ਜਿਹੜਾ ਪ੍ਰਬਲ ਹੈ ਆਪਰੇ ਨਾਲ ਆਪੇ ਉਹਦਾ ਮਨ ਉਹਦੇ ਨਾਲ ਹੀ ਹੈ ਮਨ ਬਾਹਰ ਵੀ ਮਨ ਦੇ ਬੋਲੇ ਜਹਰ ਕਰਦਾ ਹੈ ਮਨ ਹੈ ਹੀ ਨਹੀਂ ਆਦਮੀ ਦੇ ਮਨ ਵਿੱਚ ਕੀ ਹੈ ਮਨ ਦੇ ਉਹਦਾ ਹੂ ਤਾਂ ਜਾ ਰੂਗਾ ਮਨ ਨਹੀਂ ਹੈ ਜਹਰ ਕਦੇ ਹੁੰਦਾ ਤੇ ਮਨ ਕੀ ਹੈ ਜੇ ਮਨ ਬੋਲੂ ਤਾਂ ਹੀ ਪਤਾ ਲੱਗੂ ਇਹ ਕੀ ਹੈ ਉਹ ਬੋਲਦਾ ਹੀ ਨਹੀਂ ਰੈਗਮੀ ਸੋਮੇ ਦਾ ਝੂਂਜਾ ਮਾਨਾ ਸੋਦਾ ਚੇਕਾ ਕੀ ਇਹਨਾਂ ਨੂੰ ਪਿਆਸ ਹੀ ਕਰਾਉ ਆਹ ਸੋਮੇ ਦਾ ਉਹ ਚਤਾਰੇ ਵਿਧਾਨ ਨੂੰ ਮਰੂੜੀ ਰੋ ਗਿਆ ਨੂੰ ਚਤਾਰੇ ਵਿਧਾਨ ਨੂੰ ਕਿੰਨਿਆ ਉਹ ਪਹਿਲੀ ਸੇ ਦਾ ਸੋਪੀ ਇਹ ਨਾਮ ਵਾਲੀ ਕੌਣੀ ਚੱਲਦੀ ਹੈ ਨਾ ਦੁਕਾਨੇ ਕੋਰਪਸ ਤੇ ਰੋ ਵਾ ਆ ਮੈਂ ਇਹ ਉਹ ਰੋ ਦੀ ਗੱਲ ਕਰਦੀ ਕੋਰ ਰਹੀ ਕਿਆ ਨਾਲ ਨੋਟ ਨਹੀਂ ਨਿਕਲਦਾ ਫਿਰ ਰਾਜ ਜੀ ਵੀ ਪੁੱਛ ਐਥੇ ਵੀ ਪੁੱਛ ਉਹ ਫਿਰ ਚੌਥੇ ਪੜਾਅ ਵਾਲੇ ਦੀ ਗੱਲ ਕਰਦੀ ਹੈ ਉਹ ਫਿਰ ਪਹਿਲਾ ਜੀ ਉਹ ਪਹਿਲੀ ਸਟੇਜ ਵਾਲੀ ਜਿਹਾ ਕੋ ਕਰਾਂ ਮੈਂ ਕਿਹੜਾ ਅਨਲਿਸਿਸ ਸਟੇਜ ਉਹ ਕਿਆ ਨੋਟ ਹੈ ਰਾਬ ਉਥੇ ਵੀ ਆ ਬਰਾਉਥੇ ਵੀ ਰਾਬ ਪ੍ਰਾਪਤ ਪ੍ਰਬੇਰਣ ਆਪ ਤੋਂ ਵੱਡੇ ਨੂੰ ਪ੍ਰਾਪ ਕਹਿੰਦੇ ਨੇ ਆਪ ਤੁਹਾਨੂੰ ਸੀਨੀਅਰ ਨੂੰ ਪ੍ਰਾਪਤ ਕਹਿੰਦੇ ਨੇ ਉਥੇ ਰਾਮ ਸਿੰਘ ਇਹ ਹੈ ਉਹ ਬ੍ਰਹਮਤਾ ਆਪੇ ਇੱਕ ਤਾਂ ਆਪੇ ਹੈ ਇੱਕ ਜਿਹੜਾ ਬ੍ਰਹਮ ਕਹਿਣਾ ਵਿਰੋਧੋਂ ਜ਼ਿਆਦਾ ਨਹੀਂ ਹੋ ਸਕਦਾ ਉਹ ਉਥੇ ਸੰਗਤ ਹੈ ਸਾਰੀ ਸੰਗਤ ਦਾ ਜਿਹੜਾ ਸੁਧਤ ਹੈ ਉਹ ਇੱਕ ਤਾਂ ਫਿਰ ਪ੍ਰਭੂ ਉਹ ਕਿਤੇ ਬਾਤਾਂ ਨੇ ਸੱਚਾ ਉਹ ਹੈ ਉਹਨਾਂ ਨੂੰ ਸਤਸੰਗਤ ਕਹਿ ਦਿੰਦੇ ਸੱਚਖੰਡ ਜਿਹੜੇ ਬੈਠੇ ਨੇ ਉਹਨਾਂ ਨੂੰ ਸਤਸੰਗਤ ਕਹਿ ਦਿੰਦੇ ਤਨ ਤਨ ਸਤਸੰਗਤ ਜੇ ਤਾਹ ਰਸ ਪਾਇਆ ਉੱਥੇ ਪਾਇਆ ਹਰ ਰਜੇ ਚੰਦ ਨਾਮ ਪਰਗਾਸ ਜਨਾਂ ਦੇ ਨਾਮ ਉਹ ਨਾਮ ਜਨਾਂ ਦੇ ਪਰਗਾਸ ਕਰਦਾ ਇੱਥੇ ਕੋਈ ਸਤਸੰਗਤ ਨਹੀਂ ਇਹ ਤਾਂ ਕੂੜਾ ਜਾ ਕੂੜ ਪਰ ਜਾ ਸਭ ਸਾਰਾ ਪਰਮੇਸ਼ਰ ਦੀ ਗੱਲ ਕੀਤੀ ਸਾਚਾ ਸਾਧਗਨ ਉਹਨਾਂ ਸੰਤ ਝੂੜਗੰਦ ਝੂੜ ਘੜ ਵਿੱਚ ਸਾਧਾਮਤ ਕਬਨੇ ਹੋ ਜੂ ਇਹ ਤਾਂ ਫਰਾਉਡੀਆਂ ਨੇ ਬਣਾਈ ਹੋਈ ਹੈ ਫਰਾਉਡ ਹੈ ਜੀਆ ਯਾਰਾ ਬੇਅਕਲੀ ਹੈ ਬੇਸਮਝਿਆ ਹੈ ਪਰ ਉਹਨਾਂ ਨੇ ਫਰਾਉਡ ਕੀਤਾ ਸੀ ਉਹ ਹੁਣ ਬੇਅਕਲੀ ਪਹਿਲਾਂ ਪਤਾ ਸੀ ਜਿਹੜੇ ਅਲਸ ਬਦਲ ਕੇ ਗਏ ਨੇ ਉਹ ਸਮਝਦੇ ਜੀ ਗੱਲ ਨੂੰ ਕੌਣ ਆਇਆ ਨਾ ਫਰਾਉਡ ਇਹ ਬੰਦਾ ਕੋਈ ਪਤਾ ਹੀ ਨਹੀਂ ਕਾ ਜਾਂ ਫਿਰ ਸਰ ਸੰਬਤ ਉਹ ਹੁੰਦੀ ਹੈ ਸਰ ਸੰਬਤ ਕੈਸੀ ਜਾਣੀਏ ਉਹ ਵੀ ਸਰੀਰ ਕਰਕੇ ਹੀ ਹੁੰਦੇ ਨੇ ਮਾਇਆ ਚ ਹਾਂ ਉਹ ਆਤਮਾ ਕਰਕੇ ਮਾਇਆ ਜੀ ਤੇ ਉਸ ਬਾਰੇ ਹੁੰਦੀ ਮਾਇਆ ਵਿੱਚ ਦਸੀ ਇਹ ਮੇਰੇ ਨੂੰ ਸੋਚ ਤਨਾ ਲੋਕਾਂ ਦੇ ਭਰੇ ਹੁੰਦੇ ਨੇ ਫਿਰ ਮਾਇਆ ਉਸ ਲਈ ਕਿ ਕਿੰਬੋ ਹੋਏ ਹਾਂ ਹਾਂ ਕਿ ਮਾਵੇਂ ਹਾਂ ਸੰਸੈ ਸਰਾਰ ਆਹ ਸਰੀਰ ਤੋਂ ਪਰੇ ਹੀ ਹੁੰਦੇ ਨੇ ਸਰੀਰ ਤੋਂ ਪਰਿਆ ਫਿਰ ਸਰੀਰ ਹੋਵੇ ਨਾ ਹੋਵੇ ਕੋਈ ਫਰਕ ਨਹੀਂ ਪੈਂਦਾ ਠੀਕ ਹੈ ਤਾਂ ਕਹਿਣਾ ਹੈ ਜਾਣਾ ਮਾਨਸ ਆ ਜਾਂ ਫਿਰ ਉਹ ਤੇ ਹਰ ਕਿਸੇ ਕੋਲ ਸੁਹਾਜ ਹੈ ਕਿ ਇੱਦਾਂ ਜਾਣਾ ਮਾਨਸ ਆ ਉਹ ਜਾਂ ਫਿਰ ਉਹ ਵਸਤਾ ਦੀ ਗੱਲ ਹੈ ਫਿਰ ਐਹੋ ਜਿਹਾ ਵੀ ਕੋਈ ਹੈ ਨਹੀਂ ਸਾਡੇ ਕਿ ਇੱਥੇ ਆ ਤਾਂ ਉਹ ਹੈ ਕਿ ਇੱਥੇ ਆ ਤਾਂ ਉਹ ਹੈ ਦਿੰਦਾ ਛੱਜ ਹੈ ਹਾਂਜੀ ਆਪਣੀ ਗਤਮੇ ਜਾਣੋ ਆਪੇ ਆਤਮ ਸੰਗਿ ਆਪ ਉਪਰਬ ਰਾਤੇ ਸੰਗ ਆਪ ਉਪਰਬ ਆਪਣਾ ਜਿਹੜਾ ਸੰਗੀ ਹੈ ਆਪਣਾ ਮਨ ਉਹਦਾ ਉਹਨੇ ਨਾਲ ਲੈ ਕੇ ਆਪਣਾ ਆਪਣਾ ਲਗੂ ਚੜਿਆ ਹੈ ਬੰਦ ਉਸ ਪੰਚ ਦਾ ਤਾਂ ਰੰਗੋਦਾ ਰੰਗ ਇੱਕ ਹੈ ਮਨ ਦੇ ਵਿੱਚ ਕੀ ਹੈ ਜਿਹੜਾ ਉਹਦੇ ਕੋਲ ਉਹੀ ਹੈ ਬੁੱਤ ਜੋ ਪਾਇਆ ਨੇ ਪਾਡੇ ਚ ਵਸੂ ਉਹੀ ਲਕੜਨੀ ਹਥੋਂ ਪੰਜ ਔਰ ਕੀ ਹੈ ਉਹਦਾ ਹੀ ਭਰੇ ਆ ਮਨ ਵਿੱਚ ਕਿਉਂਕਿ ਭਰੇ ਉਦੇ ਮੰਤਲੋ ਭਰੇ ਆਪੇ ਭਰੇ ਉਦੇ ਉਹਦਾ ਮੰਤਉਦ ਹੁਦਦਾਈ ਉਦਾ ਰੱਤੇ ਹੋਏ ਨੇ ਇਸ ਕਰਕੇ ਉਹਨੇ ਬੁੱਧੀ ਉਸ ਤਰ੍ਹਾਂ ਜਿਹੜੀ ਹੋ ਗਈ ਆਪੇ ਹੋਏ ਨਾਨਕ ਅਗਰ ਨਾ ਜਾਣ ਸੁ ਕੋਈ ਨਾ ਜਾਣ ਇਸ ਕਰਕੇ ਤੇਰੇ ਬਾਰੇ ਕੋਈ ਜਾਣਦਾ ਨਹੀਂ ਪਹਿਲਾਂ ਤਾਂ ਚਿੱਤ ਬਾਰੇ ਦੀ ਗੁਰ ਜਾਣਦਾ ਪਿਤਾ ਜਨਮ ਕੀ ਜਾਣੇ ਹੁਣ ਬਹੁਤ ਤਾਂ ਫੂਟ ਰਿਹਾ ਕੋਦਾ ਜਨੂ ਬਾਰੇ ਨਹੀਂ ਜਾਣਦਾ ਸਰਬਾਦੇ ਤਰਫ ਆਪ ਸਭ ਕੁਝ ਜਾਣਦਾ ਪਰ ਸਰਖਿਓ ਬਾਰੇ ਨਹੀਂ ਜਾਣਦਾ ਤੇ ਉਹਦੋਂ ਬਾਬੇ ਬਾਰੇ ਵੀ ਨਹੀਂ ਜਾਣਦਾ ਬਾਬਾ ਤੁਸੋਂ ਵੀ ਗੱਲ ਹੋ ਗਿਆ ਬਾਬੇ ਬਾਰੇ ਤੁਸੋਂ ਵੀ ਨਹੀਂ ਜਾਣਦਾ ਉਹਨਾਂ ਕੀ ਜਾਂਦੇ ਇਹ ਇਹ ਤਰੀਕੇ ਨਾਲ ਗੱਲ ਭਾਸ਼ਾ ਸਾਡੀ ਹੋਈ ਜਾਂ ਪੌਲੀ ਤਾਂ ਹੁਣ ਆਪਣੀ ਇੱਥੇ ਲੜੀ ਸੀ ਉਹਨੇ ਉਹਨੂੰ ਗੱਲ ਕਰਦੂ ਬੋਲੀ ਸਾਡੀ ਹੋਈ ਜਾਂ ਇਹਦੇ ਭਾਵ ਕੁਝ ਹੋਰ ਤਾਂ ਕੁਝ ਹੋਰ